ਬਰਦ ਸਿਆਂ ਜੰਮ ਕਾ ਬੋ ਵੇਪੇ ਬੋ ਸਿਆਂ ਜੰਮ ਕਾ ਬੋ ਵੇਪੇ ਜਿੱਦ ਵੀ ਛਾਂ ਬੁੱਦੀ ਹੈ ਆਦਮੀ ਦੇ ਅੰਦਰ ਉਹਨੇ ਬਰਦ ਨੁਕਸਾਨ ਦਾ ਜ਼ਿਆਦਾ ਹੁੰਦਾ ਅਨੇਕ ਜਦਨ ਕਰ ਤ੍ਰਿਸ਼ਨਾ ਤਰਪੇ ਇਸ ਨਹੀਂ ਤਰਪਾ ਤ੍ਰਿਸ਼ਨਾ ਨਾ ਤ੍ਰਿਸ਼ਨਾ ਨਾ ਤਰਪਾ ਇਸ ਕੋਈ ਨਹੀਂ ਹਮ ਅਨੇਕ ਜਦਨ ਕਰ ਤ੍ਰਿਸ਼ਨਾ ਮਾਤਰਾ ਕਰਨ ਦੇ باوجود ਕਿਲੀ ਬੁੱਤੋ ਚਤਰੀ ਸੋਹਣੇ ਜਦੋਂ ਦਸਖਾਸ ਕਿਤੇ ਵਿੱਚ ਉਹਨੇ ਕਿ ਜਦੋਂ ਸੀ ਜੀ ਉਹ ਨਾ ਕੋਈ ਫਤਵਾ ਬਾਰੇ ਮੈਨੂੰ ਬੋਲੀ ਨਹੀਂ ਮਿਲਿਆ ਜਾਨਾ ਮੈਂ ਹਾਲੀਏ ਤੇ ਜਦੋਂ ਗਾਂ ਕਰਕੇ ਦੇਖ ਲੈ ਅਗਨ 부ਜੀ ਦੀ ਕੋੜਾ ਉਪਾਉ ਪਰ ਗਏ ਨਹੀਂ ਸਿੱਜੇ ਕੋੜਾ ਬਾਪ ਕਰਕੇ ਦੇਖ ਲੈ ਸਰਗਾ ਜਿਸੁ ਕੀ ਨਹੀਂ ਹੈ ਸਰਗਾ ਨਹੀਂ ਪਤਾ ਲੱਗਦਾ ਜਾਨੀ ਛੂੜ ਛੂਸ ਨਹੀਂ ਉਪ ਪਿਆਲ ਛੂੜ ਛੂਸ ਨਹੀਂ ਉਪ ਵੀ ਚੜਦਾ ਕੂ ਜਾਏ ਪਿਆਲੋ ਕਦੇ ਬਹੁਤ ਮਤਲਬ ਹੈ ਪੈ ਜਾ ਕਦੇ ਬਹੁਤ ਹੰਕਾਰ ਆ ਜਾਂਦਾ ਮੈਂ ਉਪ ਪਿਆਲੋ ਨਾ ਪੈ ਜਾਉਂਗਾ ਹੰਕਾਰ ਜਾਉਂਦਾ ਉਪ ਪਿਆਲੋ ਪੈ ਜਾ ਚਲਾ ਜਾਂਦਾ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 ਚੋਂ ਉਹ ਚਾਹੁੰਦੇ ਤੇ ਦਾਦੀ ਜੀ ਚੱਲੀ ਗਈ ਨੋ ਉਹਦਾ ਕੁਛ ਵੀ ਨਹੀਂ ਬਣਦਾ ਉਹ ਪਰ ਜੀ ਚਲੀ ਗਈ ਗੱਲ ਤੈਨੂੰ ਪਰਵਜੀ ਲੱਗਦਾ ਨਹੀਂ ਭਜਨ ਮੈਨੂੰ ਤਿਲ ਨਹੀਂ ਮੰਨੇ ਗੋਵਿੰਦ ਤੋਂ ਭਜਨ ਨਹੀਂ ਕਰਨੇ ਗੋਵਿੰਦ ਭਜਨ ਜੋ ਕਰ ਲਿਆ ਉਹਦੀ ਤਾਂ ਬੋਲਤਾ ਮਿਲੂਗੀ ਕੋਹ ਤਜਿੱਦ ਦੀ ਬਾਕੀ ਚੀਜ਼ ਦੀ ਕੁਛ ਵੀ ਨਹੀਂ ਹਰ ਕਾ ਜਬਤ ਜਪਤ ਜਾਏ ਹਰ ਕਾ ਨਾਮ ਜਪਤ ਸੁਖ ਜਾਏ ਹਰ ਕਾ ਨਾਮ ਜਪੜਣ ਨਾਲ ਸੁਖ ਜਾਊਗਾ ਨਾਨਕ ਬੋਲੇ ਸਹਿਜ ਸੁਭਾਈ ਨਾਨਕ ਬੋਲਦਾ ਹੈ ਕੁਝ ਸਹਿਜ ਸੁਭਾਈ ਨੂੰ ਪਾਉਂਦਾ ਸਹਿਜ ਸੁਭਾਈ ਬੋਲਦਾ ਸਹਿਜ ਨੂੰ ਜੋ ਪਾਉਂਦਾ ਬੋਲਦਾ ਸਹਿਜ ਕੌਣ ਰ ਸੱਜ ਸਭਜ ਸਹਿਜ ਸੁਭਾਈ ਸੁਭਾਈ ਇਸ ਨਾਲ ਜਦ ਕੋ ਸਹਿਜ ਹੈ ਸਹਿਜ ਸੁਭਾਈ ਬੋਲਦਾ ਜੋ ਬੋਲਦਾ ਹੈ ਜੋ ਸਹਿਜ ਨੂੰ ਸੰਸਾਰ ਨੂੰ ਪੜ੍ਹਨ ਵਾਲੇ ਨੂੰ ਜੋ ਠੀਕ ਰਗਦਾ ਉਹ ਬੋਲਦਾ ਪੂਰੀ ਪਉ ਦੀ ਗੱਲ ਕਹਿੰਦਾ ਸੱਜਾ ਨੂੰ ਬੋਲਦੀ ਹੋਵੇ ਨਾ ਪਉ ਹੋਵੇ